ਸਸੇ ਜਿ ਕਿਨੇ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਬਣਦਾ ਹੈ ਜੀ ਨਹੀਂ ਕਰਦਾ ਕਿ ਉਹ ਇਹਨਾਂ ਨੂੰ ਆਖੇ ਵੀ ਹੁਣ ਬਸ ਕਰੋ ਪਰ ਕਿੰਨੀ ਆਦੀ ਹੁੰਦਾ ਕਿ ਇੰਗਲੈਂਡ ਇੱਕ ਐਸਾ ਦਾ ਮੁਲਕ ਹੈ ਸਭ ਕੁਝ ਇੱਥੇ ਹੈਗਾ ਪਰ ਟਾਈਮ ਨਹੀਂ ਜਦੋਂ ਕੜਿਆਲ ਵੇਖੀਦਾ ਫਿਰ ਆਖੀਦਾ ਉਹ ਟਾਈਮ ਹੋ ਗਿਆ ਮੈਂ ਇਹਨਾਂ ਦਾ ਬਹੁਤ ਜਿੰਨਾ ਵੀ ਇਹਨਾਂ ਦਾ ਧੰਨਵਾਦ ਕਰੀ ਸੀ ਕਿ ਉਹਨਾਂ ਥੋੜਾ ਪਹਿਲਾਂ ਤਾਂ ਮੈਂ ਬਲਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਹਿੰਮਤ ਕੀਤੀ ਕਿ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਤੇ ਬਾਕੀ ਆਪਣੇ ਪ੍ਰੋਫੈਸਰ ਹਤਲੋਕ ਸਿੰਘ ਹੁਣੀ ਹੈ ਜਿਨੇ ਬੱਚੇ ਰਾਗ ਸਿੱਖਿਆ ਸਾਰਾ ਸਿਖਾਇਆ ਉਹਨਾਂ ਨੇ ਤੇ ਸੱਚ ਪਾਈ ਕਰੀ ਬਖਸ਼ੇ ਕੀਤੀ ਕਹਿੰਦੇ ਤੁਹਾਨੂੰ ਮੈਂ ਹੀਰਾ ਬਖਸ਼ਿਆ ਤੇ ਤੁਸੀਂ ਇਹਨਾਂ ਤੋਂ ਜਿੰਨਾ ਗੁਣ ਸਿੱਖੋਗੇ ਉਹਨਾਂ ਤੋਂ ਰਾਗ ਕਹਿ ਲੋ ਬਾਣੀ ਕਹਿ ਲੋ ਬੇ ਕੁਸ਼ੀ ਔਰ ਬੱਚਿਆਂ ਨੇ ਉਹਨਾਂ ਤੋਂ ਬਹੁਤ ਸਿੱਖਿਆ ਜਿੰਨੇ ਵੀ ਸਾਡੇ ਬੱਚੇ ਨੇ ਔਰ ਸ਼ਾਸਤਰੀ ਸੰਗੀਤ ਵਿੱਚ ਕਾਫੀ ਉਹਨਾਂ ਨੇ ਸਿੱਖਿਆ ਲਈ ਹੈ ਔਰ ਮੈਂ ਤਾਂ ਤਕੀਬ ਨਾਲ ਸੋਚਦਾ ਕਿ ਜਦੋਂ ਕਿ ਪ੍ਰੋਫੈਸਰ ਜੀ ਨੇ ਆਖਿਆ ਵੀ ਤੁਸੀਂ ਆਏ ਹੋ ਮੈਂ ਆਕੇ ਵੀ ਸਾਡੇ ਤਾਂ ਸਿਰ ਮੱਥੇ ਵੀ ਤਕੀਬਨ ਉਹ ਕਹਿਣ ਤੇ ਫਿਰ ਤਾਂ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੜੀ ਤੁਸੀਂ ਕਿਰਪਾ ਕੀਤੀ ਹੈ ਉਹ ਮੰਨ ਤੁਸੀਂ ਐਸਾ ਮੋਇਆ ਤੇ ਜੀ ਨਹੀਂ ਸੀ ਕਰਦਾ ਵੀ ਉਹ ਟਾਈਮ ਆਲ ਦੇਖ ਕੇ ਆਖੇ ਵੀ ਟਾਈਮ ਤਾਂ ਪੱਜਿਆ ਜਾ ਰਿਹਾ ਫਿਰ ਤੁਸੀਂ ਲੰਡਨ ਵੀ ਵਾਪਸ ਜਾਣਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਥ ਦਾ ਧੰਨਵਾਦ ਸਾਸੰਗ ਦਾਇਦਾ ਬਹੁਤ ਧੰਨਵਾਦ ਹੈ। ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ। ਰਾਗੀ ਸਤਨਾਮ ਸਿੰਘ ਜੀ, ਬਲਬੀਰ ਸਿੰਘ ਜੀ ਅਤੇ ਪ੍ਰੋਫੈਸਰ ਤਸੀਮ ਜੀ ਦਾ ਬਹੁਤ ਬਹੁਤ ਵਧਾਵਾ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਪ੍ਰਤਾਨਜੇ ਕੀ ਬੇਨਤੀ ਕਰਾਂਗਾ ਕਿ ਸਾਸੰਗ ਲੋ ਸਿਰਪਉ ਰਾਗੀ ਜੀ ਨੂੰ ਰਾਗੀ ਸਤਨਾਮ ਸਿੰਘ ਜੀ ਆਪਣਾ ਸਿਰਪਉ ਸਵੀਕਾਰ ਕਰਨ। ਤੋਂਸਤ ਪ੍ਰੰਤ ਰਾਗੀ ਬਲਬੀਰ ਸਿੰਘ ਜੀ ਅਤੇ ਪ੍ਰੋਫੈਸਰ ਜੀ। ਜੋ ਬੋਲੇ ਸੋਨੇ ਹ। ਸਤ ਸਿੰਘ ਜੀ ਸਾਰੇ ਗੱਜ ਗਿਆਨ ਸੇ ਸਤਗੁਰੂ ਜੀ ਜੀ ਸਿੰਘ ਸਾਡੇ ਬਹੁਤ ਵਧੀਆ ਭਾਗ ਨੇ ਕਿ ਸਤਗੁਰੂ ਜੀ ਨੇ ਵਿਦ ਬਣਾਈ ਇਹਨਾਂ ਦੇ ਉੱਚ ਕੋਟੀ ਰਾਗਿਆਂ ਦੇ ਸੰਦರ್ಶਨ ਕਰਵਾਏ ਮੈਨੂੰ ਬਚਨ ਯਾਦ ਆ ਗਿਆ ਸਤਗੁਰੂ ਰਾਮ ਸਿੰਘ ਜੀ ਜਦੋਂ ਕੁੰਭੀ ਦੇ ਮੇਲੇ ਤੇ ਗਏ ਉਸ ਵੇਲੇ ਅਮਰ ਤਿਆਰ ਕੀਤਾ ਅੰਬਨ ਦੇ ਪੱਤਿਆਂ ਦਾ ਭਾਗ ਕੇ ਜਿਹੜੇ ਰਾਗੀ ਦਿੱਤੂ ਸੀਗਾ ਜਿਹਦਾ ਨਾਮ ਬਾਅਦ ਵਿੱਚ ਹਰਦੇਤ ਸਿੰਘ ਰੱਖਿਆ ਗਿਆ ਸੱਚੇ ਪਾਈ ਕਹਿੰਦੇ ਹੁਣ ਅਮਰਤ ਪਾਣੀ ਆ ਤੈਨੂੰ ਰਾਗ ਪਿਆਈਏ ਕੁੰਬੀ ਦੇ ਮੇਲੇ ਤੇ ਉਹਨੂੰ ਅਮਰਤ ਪਿਆਇਆ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਤੇ ਤੇਰੀ ਸੁਰ ਨਹੀਂ ਕਦੀ ਵੀ ਟੁੱਟੇਗੀ ਅੱਜ ਇਹਨਾਂ ਰਾਗੀਆਂ ਵੱਲ ਦੇਖ ਕੇ ਮੈਨੂੰ ਉਹ ਬਚਨ ਯਾਦ ਆ ਗਿਆ ਨੀ ਤਾਂ ਉੱਚੀ ਨੀਮੀ ਸੁਰ ਕਰਦੇ ਸਰੀਰ ਨੂੰ ਬਹੁਤ ਤੰਗੀ ਦਿੰਦੇ ਨੇ ਕਈ ਤੇ ਇਹਨਾਂ ਦੀ ਇੱਥੇ ਬੜੀ ਬਖਸ਼ਿਸ਼ ਫੇਰ ਸਤਗੁਰ ਜੀ ਸਿੰਘ ਜੀ ਦਾ ਇਹਨਾਂ ਨੇ ਜ਼ਿਕਰ ਕੀਤਾ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਦੀ ਤਾਂ ਸਾਰੇ ਸੰਸਾਰ ਤੇ ਬਖਸ਼ਿਸ਼ ਹੈ ਜੇ ਸੱਚ ਪੁੱਛੋ ਜੇ ਸਤਗੁਰ ਜੀ ਗਜੀਤ ਸਿੰਘ ਜੀ ਦੀ ਕਿਰਪਾ ਨਾ ਹੋਵੇ ਸੰਸਾਰ ਦੇ ਵਿੱਚੋਂ ਜਿਹੜਾ ਸ਼ਾਸਤਰੀ ਸੰਗੀਤ ਹੈ ਬਿਲਕੁਲ ਮਿਟ ਜਾਂਦਾ ਇਹ ਉਹਨਾਂ ਦੀ ಅಪਾਰ ਕਿਰਪਾ ਇਹੋ ਜਿਹੇ ਰਾਗੀ ਜਿਹੜੇ ਕਿ ਫਿਲਮਾਂ ਦੇ ਪਿੱਛੇ ਲੱਗ ਕੇ ਉਧਰ ਨੂੰ ਸੰਗੀਤ ਨੂੰ ਬੁਗੜ ਰਹੇ ਸੀ ਸੱਚ ਬਾਹ ਇਹਨੂੰ ਚੁੰਨ-ਚੁੰਨ ਕੇ ਬਾਹਰ ਕੱਢਿਆ ਪੱਲਿਓ ਪੈਸੇ ਦੇ ਦੇ ਕੇ ਉਹਨਾਂ ਨੂੰ ਉਧਰੋਂ ਹਟਾਇਆ ਭਾਈ ਇਹ ਜਿਹੜੀ ਸਾਡੀ ਸਭਤਾ ਹੈ ਪੁਰਾਤਨ ਸਭਤਾ ਹੈ ਸੰਗੀਤ ਦੀ ਇਹਨੂੰ ਬਚਾਉਣ ਵਾਸਤੇ ਇਹਨੂੰ ਬਚਾਓ ਇਨੂੰ ਬਰਬਾਦ ਨਾ ਕਰੋ ਫੇਰ ਯਾਦ ਆ ਗਿਆ ਸਰਗੋਪ੍ਰਤਾਪ ਸਿੰਘ ਜੀ ਸੱਚੇ ਬਾਦਸ਼ਾਹ ਜੀ ਅਫਰੀਕਾ ਦੇ ਹੋਲੇ ਤੇ ਰਾਗ ਇਕੱਠੇ ਹੋਏ ਤੇ ਸੱਚੇ ਬਾਸ਼ੇ ਬਾਦ ਦੇ ਚ ਕਿਰਪਾ ਕੀਤੀ ਕਹਿੰਦੇ ਭਈ ਇੰਨਾ ਚੰਗਾ ਵੀ ਅਸੀਂ ਟੱਡ ਸਣਕੀਆਂ ਤੇ ਛਣੇ ਤੋਂ ਬਚ ਗਏ ਤੋ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਨਾ ਇਹ ਜਿਹੜਾ ਟੱਡ ਛਣੇ ਤੇ ਸਣਕੀਆਂ ਦਾ ਉਹਦੇ ਵਿੱਚ ਰਾਗ ਨਹੀਂ ਰਹਿ ਗਿਆ ਰਾਗ sachpaaji bakhshish karde ne vi tantri sajan de naal raag kyunki bajje de vich vi kai sur eh ho jainde ਨੇ oh nahi oh poore nahi bande inna da bahut bahut assi rehni aa jinna ne aake sade te inni bakhshish di hai sanu raaga de vich gurvani sarvan kurwai hai agli dafa pher kadi bakhshish karan te assi anal ko purane reeta sunniya kampale de vich ustad bhagat singh hunde sachche badshah ji onna nu bahut saraya utthe ਆਖਿਆ ਕਿ ਇਹਨਾਂ ਕੋਲ ਬਹੁਤ ਚੀਜ਼ਾਂ ਹੈਗੀਆਂ ਨੇ ਲੇਕਿਨ ਇਹਨਾਂ ਦਾ ਅਗਾਹ ਵਧਣ ਦਾ ਸਾਧਨ ਨਹੀਂ ਹੈ ਕਿਉਂਕਿ ਕੋ ਨਾਲ ਤਵਲਚੀ ਨਹੀਂ ਹੈ ਕਿਉਂਕਿ ਜਿੰਨੀ ਦੇਰ ਤਾਈ ਤਵਲਾ ਨਾ ਹੋਵੇ ਨਾਲ ਤੇ ਉਹ ਬੰਦਿਸ਼ ਪੂਰੀ ਨਹੀਂ ਬਣਦੀ ਮੈਂ ਆਸ ਰੱਖਦਾ ਹਾਂ ਫੇਰ ਵੀ ਕਦੀ ਜਦੋਂ ਵੀ ਮੌਕਾ ਲੱਗੇ ਇੱਥੇ ਆਣ ਤੇ ਸਾਨੂੰ ਔਰ ਇਹਨਾਂ ਦੇ ਕੰਠ ਦੇ ਵਿੱਚ ਇੰਨੀ ਲਚਕ ਹੈ ਇਹ ਸਤਗੁਰ ਦੀ ਬਖਸ਼ਿਸ਼ ਤੋਂ ਬਗਾਰ ਗੁਰੂਆਂ ਦੀ ਬਖਸ਼ਿਸ਼ ਤੋਂ ਬਗਾਰ ਉਸਤਾਦਾਂ ਦੀ ਬਖਸ਼ਿਸ਼ ਤੋਂ ਬਗਾਰ ਮਿਲਣੀ ਅਸੰਭਵ ਹੈ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ ਸਾਡੇ ਬਹੁਤ ਰੈਣੀ ਵੀ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆਮ ਨਹੀਂ ਮਿਲਦੀ ਹੈਗੀਆਂ ਬਾਜ਼ਾਰ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਸੱਚੇ ਭਾਈ ਕਹਿੰਦੇ ਆ ਅਸੀਂ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਲੈਣੀਆਂ ਜਿਹੜੀਆਂ ਸਾਨੂੰ ਸਤਗੁਰੂ ਵਾਲੇ ਦੇ ਪਾਸੇ ਲੱਗ ਸੋ ਇਹਨਾਂ ਦੇ ਬਹੁਤ ਰੈਣੀ ਸਾਧ ਸੰਗ ਜੀ ਸੱਸੀ